शलोक महला ਤੀਜਾ शेखा चौ ਚੱਕਿਆ चौ ਵਾਇਆ ਇਹ ਮਨ ਇਕਤ ਕਰ ਆਣ ਇਹ ਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਵਾਛੇ ਗੁਰੂ ਕਹਿਆ ਵੀ ਤੂੰ ਚਾਰਾਂ ਚੱਕਾਂ ਦੇ ਵਿੱਚ ਫਿਰਦਾ ਤੁਰਪੇ ਤੈਨੂੰ ਕਰਨ ਤੌਰ ਤੇ ਕੋਈ ਲੋੜ ਨੀ ਫਿਰ ਵੀ ਜਾਂ ਨਾ ਵੀ ਫਿਰ ਕੋਈ ਫਰਕ ਪੈਂਦਾ ਬੋਲੂ ਟਗਾਣੇ ਰੱਖ ਆਪਣੇ ਰੂਪ ਠੀਕ ਹੈ ਸ਼ੇਖ ਅੱਛਾ ਉਹ ਆਪਣੇ ਆਪ ਨੂੰ ਧਾਰਮਿਕ ਸਦਾਉਂਦੇ ਦੇ ਅੱਛਾ ਜੀ ਠੀਕ ਹੈ ਉਹਨਾਂ ਨੂੰ ਕਿਹਾ ਕਿ ਇਹ ਮਨ ਇਕਤ ਕਰ ਆਣ ਇਸ ਮਨ ਨੂੰ ਆਪਣੇ ਖਰਚ ਲਿਆ ਹੈ ਜੀ ਵਾਪਸ ਮੋੜ ਕੇ ਅੱਛਾ ਕਾਉਂਡ ਦਾ ਮਤਲਬ ਇਹਦਾ ਇਹ ਟਿੱਕ ਦਾ ਇਹੜ ਤੇਹੜ ਛੱਡ ਤੂੰ ਗੁਰਕਾ ਕਰਦਾ ਗੁਰਕਾ ਸ਼ਬਦ ਹੈ ਉਹ ਚ ਪਛਾਣ ਵੀ ਅਰਬੂਤੀ ਹੁੰਦਾ ਪਰ ਉਹਨਾਂ ਕੋਲ ਕਿਹੜਾ ਗੁਰਕਾ ਸ਼ਬਦ ਹੈ ਉਹਨਾਂ ਕੋਲ ਕੁਰਾਨ ਹੈ ਜੀ ਕਾਫੀ ਹੱਦ ਤੱਕ ਤਾਂ ਉਹਨਾਂ ਕੋਲ ਬੁక్తి ਤਕਤੀ ਗਲ ਤੱਕ ਉਹਨਾਂ ਕੋਲ ਵੀ ਹੈ ਉਹ ਇੱਕ ਨੇਕ ਆਦਮੀ ਬਣਨ ਦੀ ਗਲਤੀ ਉਹਨਾਂ ਕੋਲ ਵੀ ਹੈ ਉਹ। ਯਾਬੀ ਨੇਕ ਦੇ ਵਿੱਚ ਹੈਗੇ ਸੀ ਆਦਮੀ। ਤਾਂ ਹੀ ਉਹਨਾਂ ਨੇ ਗੁਰੂ ਘਰ ਨੂੰ ਬੱਲਿਆ। ਤੋਂ ਅੱਗੇ ਹਥਿਆਰ ਥੜੋ। ਸਤ ਗੁਰ ਤੇ ਖਾਲੀ ਕੋਈ ਨਹੀਂ। ਦਰਵਾਜ਼ਾ ਅਹੀਂ ਅੱਗੇ ਸੱਦੀ ਉਹ ਗੱਲੋ ਜੋ ਸਿਰ ਥਾਣੀ ਨਾਲ ਮਹਿਸੂਸ ਕਰਪੋਤਾਰ ਇਹ ਮਨ ਰੂਪੀ ਸਹਿ ਰਾਜਾ ਰੂਡੀ ਵਕਰੋ ਹਾਂਜੀ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਆਸਾ ਜਿਹੜੀ ਹੈਗੀ ਮਤਸਾ ਦੀ ਬੁਲਦੀ ਇੱਛਾ ਇਹ ਗਰਾਜ਼ੇ ਜਾਣਦੇ ਪਰ ਜਿਹੜੀ ਇੱਛਾ ਪੈਦਾ ਹੁੰਦੀ ਹੈ ਉਹਨੂੰ ਤਿਆਗ ਤਿਆਗ ਕਰ ਇਹ ਮਾਇਆ ਦੀ ਪੈਦਾ ਹੁੰਦੀ ਹੋਏ ਰਹੋ ਬੇਵਰ ਵਾਹਿਗੁਰੂ ਕਹਿ ਰਿਹਾ ਵੀ ਆ ਸੰਸਾਰ 'ਚ ਬਹੁਤੇ ਰਾਜ ਭਾਗ ਕਰਕੇ ਅਸੀਂ ਇਕੱਠੇ ਕੀ ਲੈਣਾ ਕੋਈ ਜਾਤੀ ਰੋਜ਼ ਰੋਲ ਬਣਾ ਕਰੋ ਠੀਕ ਹੈ ਜੀ ਸਤ ਗੁਰ ਕੇ ਭਾਣੇ ਭੀ ਚੱਲੇ ਪਾ ਚੱਲੇ ਦਰਗਾਹ ਦੇ ਵਿੱਚ ਮੌਲ ਮਿਲਦੀ ਦਰਗਾਹ ਚਲਾਉਂਦਾ ਹੋਊਂਗੇ ਮਹਿਮਾਨ ਕਿਹਾ ਸੀਗਾ ਉਹਦਾ ਭਾਵ ਇਹ ਹੈ ਆਪਾਂ ਇਨੂੰ ਆਪਣਾ ਪੱਕੀ ਰਹਿਸ਼ ਨਹੀਂ ਸਮਝਣਾ ਹੈ ਜੀ ਹਾਂਜੀ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤ੍ਰਿਗ ਪੈਨਣ ਤ੍ਰਿਗ ਖਾਣ ਜੇ ਲੋਭ ਦੇ ਪ੍ਰਤੀ ਚੇਤਨੀ ਹੋਇਆ ਨੂੰ ਸਮਝੀ ਲੱਗੀ ਮਹੱਲਾ ਤੀਜਾ ਹਰ ਗੁਣ ਟੋਟਣਾ ਆਵਈ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮੈਂ ਰਹੇ ਸਮਾਈ ਪਰ ਜਿਹੜੇ ਹਰੀ ਦੇ ਗੁਲਦੇ ਉਹਦੇ ਟੋਟਾ ਨਹੀਂ ਜਿਹੜੇ ਮਰਜੀ ਕਾਈ ਜਾਓ ਉਹਦਾ ਟੋਟਾ ਨਹੀਂ ਹੁੰਦਾ ਕਦੇ ਹਰ ਗੁਣ ਟੋਟਣਾ ਆ ਗਈ ਕਹਿ ਨਾ ਜਾਏ ਆਉਦੀ ਫਿਰ ਕੀਮਤ ਤਾਂ ਦੱਸੀ ਜਾ ਸਕਦੀ ਤਾਂ ਹੀ ਮੁੱਲ ਹਾਂਜੀ मानक गुरमुखी हर गुण रवें गुण में रहे समाए जड़े गुरमुख हैं ओ हर गुण को ग्रहण करते हैं धारण करते हैं रवें उनका धारण करते हैं जैसे ही हो जाते हैं फिर हर गुण धारण करके हल जैसे ही हो जाते हैं हरजा में ऐसा चाहिए जैसा हरि होए और हर जब ऐसा ताली होगा जो तेरे गुण धारण कर ਕੀਕੇ ਜੀ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਂਦੀ ਭਗਤੀ ਕਰ ਹਰ ਪਾਠ ਲਗਾ ਅਧਿਕਾਈ ਬਹੁ ਬਹੁ ਵਿਦ ਭਾਤ ਕਰ ਆ ਜਿਹੜੇ ਚੋਲੀ ਅਦਲਾ ਸਰੀਰ ਹੈ ਹਾਂਜੀ ਰਤਨ ਦਾ ਚੋਲਾ ਜਿਹੜਾ ਰੰਗ ਚੜ੍ਹਦਾ ਸਵਾਰੀ ਹੈ ਕੇ ਰੂਪ ਕਰਦਾ ਅੱਛਾ ਜੀ ਹਰ ਚੋਲੀ ਦੇਹ ਸਵਾਰੀ ਉਹ ਦੇਹੀ ਗੁਪਤਾ ਜਿਹੜੀ ਉਸ ਮਾਰੀ ਹੈ ਕੱਢ ਪੈਂਦੀ ਭਗਤੀ ਕਰ ਜੇ ਤੇ ਭਲੇ ਸੁਠਾਲ ਜੋ ਗਿਆਨ ਦੀ ਚੋਲੀ ਪਹਿਨਦੀ ਉਹ ਪੱਟ ਹੈ ਤੇ ਕੱਢ ਪੈਂਦੀ ਮਤਲਬ ਲਿਖਿਆ ਕੱਢੀ ਪੈਂਦੀ ਅੱਛਾ ਕੱਢੀ ਦਿੱਤੀ ਬਣਦਾ ਜੀ ਹੋਈ ਹੈ ਕੱਢ ਪੈਨ ਦੀ ਭਗਤੀ ਕਰੀ ਭਗਤੀ ਕਰਕੇ ਕੱਢੀ ਹੋਈ ਹੈ ਇਹਹ ਨਹੀਂ ਜਾਂਦੀ ਹੈ ਕੱਢੀ ਭਗਤੀ ਤੋਂ ਕੱਢੀ ਨਹੀਂ ਜਾਂਦੀ ਜੀ ਹਰ 파ਟ ਲੱਗਾ ਅਧਕਾਈ ਬਹੁਤ ਲੱਗਿਆ ਇਹਦੇ ਤੇ ਲੱਗਿਆ ਇਹ ਕੀ ਹੁੰਦਾ ਜੀ 파ਟ ਕਪੜਾ ਅੱਛਾ ਜਿਹਦੀ ਬਣੀ ਹੋਈ ਆ ਉਹ ਪਟਦੇ ਇਹਦਾ ਕਿਹਦਾ ਬਣਦਾ ਜੀ ਬਹੁਤ ਉੱਤਮ ਜੀ ਬਹੁ ਬਹੁ ਵਿਦ ਭਾਂਤ ਕਰੀ ਬਹੁਤ ਬਹੁਤ ਤਰੀਕੇ ਨਾਲ ਇਹਦਾ ਇਹਦੀ ਸੁੰਦਰਤਾ ਖੜੀ ਹੈ ਬੜੀ ਹੈ ਠੀਕ ਹੈ ਕੋਈ ਬੁੱਝ ਬੁੱਝਣ ਹਾਰਾ ਅੰਤਰ ਵਿਵੇਕ ਕਰੀ ਕੋਈ ਆਦਮੀ ਬੁੱਝ ਸਕਦਾ ਹੋਣਾ ਗੱਲ ਕੀ ਕਹੀ ਹੈ ਕਿੱਧਰ ਇਸ਼ਾਰਾ ਆ ਆਮ ਬੁੱਧੀ ਵਾਲਿਆ ਮੁਝੀ ਬੁੱਝ ਸਕਣਗੇ ਇਹ ਗੱਲ ਕੋਈ ਕੋਈ ਆਦੀ ਬੁੱਝੂਏ ਕੀ ਗੱਲ ਹੈ ਕਦਰਾਕਾਰੀ ਸਰੀਰ ਦੀ ਗੱਲ ਹੈ ਜੇਰਾਕਾਰੀ ਪਾਟਪਟ ਨੰਬਰ ਦੀ ਗੱਲ ਹੈ ਇਹ ਤੇ ਆਗੇ ਬੁੱਝਣ ਵਾਲੀ ਗੱਲ ਆ ਜੀ ਹਾਰਤ ਵਾਲੀ ਗੱਲ ਸੋ ਮੁਝੈ ਇਹ ਵਿਵੇਕ ਜਿਸ ਬੁਝਾਏ ਆਪ ਹਰ ਓਏ ਵਿਵੇਕ ਨੂੰ ਨਹੀਂ ਬੁੱਝ ਸਕਦਾ ਜੇ ਤੂੰ ਹਰ ਆਪ ਬੁਝਾਵੇ ਆਪ ਬੁਝਾਏ ਜਨ ਨਾਨਕ ਕਹੇ ਵਿਚਾਰਾ ਗੁਰਮੁਖੀ ਹਰ ਸਤ ਹਰ ਧਾਨਕ ਤਾਂ ਇਹੀ ਗੱਲ ਕਹਿ ਰਿਹਾ ਵਿਚਾਰਾ ਗੁਰਮੁਖੀ ਕੋਈ ਫਰਕ ਨਹੀਂ ਰਿਹਾ ਹਰ ਤੋਂ ਕੀ ਭਾਵ ਬਣਦਾ ਜੀ ਕਿ ਜਿਹੜਾ ਹਰ ਹੈ ਸਤ ਸਰੂਪ ਹੈ ਆ ਤਾਂ ਹੋ ਗਿਆ আর ਜਿਹੜਾ ਸਤ ਹੈ ਹਰ ਤਾਂ ਸਤ ਸਰੂਪ ਹੀ अच्छा जी। ਇਹ ਵੀ ਜ਼ਤ ਹੋ ਗਿਆ ਜਿਹੜਾ ਅਮੇਸ਼ਾ ਤੇ ਕਹਿਣ ਦਾ ਭਾਵ ਗੁਰਮੁਖ ਹੈ ਉਹ ਆਪ ਹਰ ਹੋ ਔਰ ਜਿਹੜਾ ਹਰ ਹੈ ਉਹ ਤਾਂ ਸਤ ਸਰੂਪ ਹੈ ਹੀ। ਆ ਜਮੁਲਪੁਣ ਗਿਆ ਉਹਦਾ। ਠੀਕ ਹੈ ਜੀ। ਇੱਥੇ 11ਵੀਂ ਪੌੜੀ ਸਮਾਪਤੀ ਹੈ ਜੀ। ਜੀ।